ਦੀਵਾ ਨਮਸਤਾਨਾ ਹੋ ਗਿਆ ਕਹਿੰਦਾ ਕਰਨੇ ਆਇਆ ਮੈਂ ਨਿਸ਼ਾਨਾ ਹੋ ਗਿਆ ਮੈਂ ਤਾਂ ਕਰਨ ਵਾਸਤੇ ਕੁਛ ਹੋਰ ਆਇਆ ਸਾਂ ਓਡੀ ਗੱਲ ਹੋਰ ਬਣ ਗਈ ਸਿੱਖ ਬਣ ਗਿਆ ਮਰ ਨਿਰਮਲ ਹੋ ਗਿਆ ਬਸ ਫਿਰ ਮੰਗਲ ਸਿੰਘ ਵਾਪਸ ਘਰ ਨਹੀਂ ਜਾ ਸਕਿਆ ਆਖਣ ਲੱਗਾ ਬੇਨਤੀਆਂ ਕਰਦਾ ਫਿਰਦਾ ਹੁਣ ਜਿੱਥੇ ਬੈਂਦੇ ਨੇ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਹੁੰਦੀ ਸੀ ਸੱਚੇ ਪਾਤਸ਼ਾਹ ਤੂੰ ਪਿਛਲੇ ਜਨਮਾਂ ਵਿੱਚ ਮੈਨੂੰ ਵਿਛੋੜੀ ਰੱਖਿਆ ਬਹੁਤ ਦੂਰ ਰਿਹਾ ਤੇਰੇ ਤੋਂ ਮੈਂ ਹੁਣ ਇਸ ਜਨਮ ਵਿੱਚ ਤੇਰੇ ਨਾਲੋਂ ਵਿਛੜਾਗਾ ਨਹੀਂ ਜਿੱਥੇ ਜਾਓਗੇ ਨਾਲ ਜਾਵਾਂਗਾ ਇਹ ਨਾਲ ਵਾਪਸ ਸ੍ਰੀ ਭੈਣੀ ਸਾਹਿਬ ਆ ਗਿਆ ਘਰ ਨਹੀਂ ਸੀ ਗਿਆ ਵਾਪਸ ਚੀਨੀ ਘੋੜੀ ਇਹਦੇ ਕੋਈ ਸੀ ਮੱਥਾ ਟੇਕ ਦਿੱਤੀ ਸਤਿਗੁਰੂ ਰਾਮ ਸਿੰਘ ਜੀ ਨੂੰ ਇਹ ਸਰਦਾਰ ਮੰਗਲ ਸਿੰਘ ਨੇ ਮੱਥਾ ਟੇਕੀ ਸੀ ਜਿਹਦੇ ਤੋਂ ਚੀਨੀ ਵਾਲਾ ਨਾਮ ਪੈ ਗਿਆ ਸਤਿਗੁਰਾਂ ਦਾ ਸਭ ਕੁਝ ਮੱਥਾ ਟੇਕ ਕੇ ਸਤਿਗੁਰਾਂ ਦੇ ਨਾਲ ਸ੍ਰੀ ਭੈਣੀ ਸਾਹਿਬ ਆ ਗਿਆ ਜਿੱਥੇ ਜਾਣਾ ਨਾਲ ਜਾਣਾ ਇਹ ਆਖਰੀ 10 ਕੁ ਸਾਲ ਸਤਗੁਰਾਂ ਨੂੰ ਪ੍ਰਚਾਰ ਕਰਨ ਦੇ ਮੇਲੇ ਇਹਨਾਂ 10 ਸਾਲਾਂ ਵਿੱਚ ਸਤਗੁਰਾਂ ਦੇ ਨਾਲ ਰਿਹਾ ਔਰ ਜਿਸ ਦਿਨ ਸਤਗੁਰੂ ਰਾਮ ਸਿੰਘ ਜੀ ਜਲਾਵਤਨ ਹੋਏ ਲੁਧਿਆਣੇ ਤੋਂ ਇੱਕ ਰੇਲ ਵਿੱਚ ਬੈਠੇ ਸਨ ਨਾਲ ਸੰਤ ਮੰਗਲ ਸਿੰਘ ਉਹ ਸਰਦਾਰ ਮੰਗਲ ਸਿੰਘ ਤੋਂ ਸੰਤ ਮੰਗਲ ਸਿੰਘ ਬਣਦਾ ਇਹ ਨਾਲ ਜਲਾਵਤਨ ਹੋਇਆ ਨਾਲ ਹੀ ਅਲਾਬਤ ਤੱਕ ਆਇਆ ਅੱਗੇ ਇਤਿਹਾਸ ਵੱਖਰਾ ਹੈ ਮੈਂ ਅਰਜ ਕੀਤੀ ਸੀ ਕਿ ਸਤਿਗੁਰੂ ਦਾ ਦਰਸ਼ਨ ਐਸਾ ਹੈ ਜਿਹੜਾ ਦਰਸ਼ਨ ਮਨੁੱਖ ਦੇ ਜਿਹੜਾ ਜਨਮ ਤੇ ਮਰਨ ਘਟ ਦਿੰਦਾ ਐਵੇਂ ਨੀਚ ਤੋਂ ਊਚ ਕਰ ਦਿੰਦਾ ਗੁਰਮੁਖ ਮਨਮੁਖ ਤੋਂ ਗੁਰਮੁਖ ਬਣਾ ਦਿੰਦਾ ਚੋਰ ਤੋਂ ਸੰਤ ਬਣਾ ਦਿੰਦਾ ਕਊਆ ਹੰਸ ਹੋ ਹੈ ਕਾਂ ਵਰਗੇ ਕਾਲੇ ਮਨੁੱਖਾਂ ਨੂੰ ਕਾਲੇ ਮਨ ਵਾਲੇ ਮਨੁੱਖਾਂ ਨੂੰ ਹੰਸ ਬਣਾ ਕੇ ਰੱਖ ਦੇਣਾ ਇਹ ਸਤਿਗੁਰਾਂ ਵਿੱਚ ਗੁਰੂ ਕੇ ਦਰਸ਼ਨ ਵਿੱਚ ਸਿਫਤਾਂ ਅਸੀਂ ਮੇਰੇ ਹੋ ਸਾਡੀ ਹੋਸ਼ ਤੋਂ ਪਹਿਲਾਂ ਦੀ ਥੋੜੀ ਜਿਹੀ ਗੱਲ ਹੈ 1927 ਵਿੱਚ ਆ ਜਿਹੜਾ ਹੁਣ 2000 ਹੈ ਇਹ ਹੀ ਸਨ 1927 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੋਲਾ ਬੇਲਾ ਜਿਹੜਾ ਹਮੇਸ਼ਾ ਹੁੰਦਾ ਹੈ ਜਿਲ੍ਹਾ ਸਿਆਲਕੋਟ ਦੇ ਸ਼ਹਿਰ ਨਾਰੋਵਾਲ ਵਿੱਚ ਕੀਤਾ ਸੀ ਇਸ ਹੋਲੇ ਦੀ ਖਾਸ ਮਹਾਨਤਾ ਹੈ ਇੱਥੇ ਬਹੁਤ ਇਸ ਇਲਾਕੇ ਦੀ ਸੰਗਤ ਤੇ ਪ੍ਰਭਾਵ ਪਿਆ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਨਾਮ ਧਾਰੀ ਸਿੱਖੀ ਬਹੁਤੀ ਵੇਖੀ ਜਾਂਦੀ ਸੀ ਸਤਕੁਰਾਂ ਦੀ ਇੰਨੀ ਕਿਰਪਾ ਰਹੀ ਹੈ ਇਸ ਪਾਸੇ ਉਸ ਇਲਾਕੇ ਵਿੱਚ ਇਸ ਹੋਲੇ ਵਿੱਚ ਇੱਕ ਪਿੰਡ ਫਤੂਹੀ ਚੱਕ ਦਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਸਾਡਾ ਪਿੰਡ ਹੀ ਹੈ ਜਿੱਥੋਂ ਦੇ ਸੰਤ ਮੰਗਲ ਸਿੰਘ ਜੀ ਹੋਏ ਨੇ ਨੰਬਰਦਾਰ ਸੀ ਪਿੰਡ ਦਾ ਭਦਰ ਸਿੰਘ ਨਾਮ ਸੀ ਹੋਣ ਨੰਬਰਦਾਰ ਜਿਹੜਾ ਪਿੰਡ ਦਾ ਹੋਵੇ ਉਹਦਾ ਕਰਮ ਸੰਤਪੁਣੇ ਵੱਲ ਨਹੀਂ ਹੁੰਦਾ ਹਰ ਵਕਤ ਪੁਲਿਸ ਨਾਲ ਬੈਠਣਾ ਉੱਠਣਾ ਸਭ ਕੁਝ ਕਰਨਾ ਮਾਸ ਤੇ ਸ਼ਰਾਬ ਦਾ ਆਦੀ ਖਾਣ ਪੀਣ ਵਾਲਾ ਸਾਡੇ ਪਿੰਡ ਵਿੱਚੋਂ ਸੰਗਤਾ ਤਿਆਰ ਹੋਈਆਂ ਪੰਜ ਸੱਤ ਨਾਮ ਧਾਰੀ ਕਰ ਸਣ ਮੰਗਲ ਸਿੰਘ ਉਹਨਾਂ ਦਾ ਘਰ ਉਹਨਾਂ ਦਾ ਭਰਾ ਸੀ ਸਦਾਗਰ ਸਿੰਘ ਜਿੰਨਾ ਦਾ ਅਗੋ ਪਰਿਵਾਰ ਸੀ ਕਰਤਾਰ ਸਿੰਘ ਗੁਰਦਿਆਲ ਸਿੰਘ ਜਸਵੰਤ ਸਿੰਘ ਇਹ ਅੱਜਕੱਲ ਜ਼ਿਲ੍ਹਾ ਦੁਰਦਾਸਪੁਰ ਪਿੰਡ ਬਰੀਲੇ ਵਿੱਚ ਬੈਠੇ ਹੋਏ ਨੇ ਉਹ ਪਰਿਵਾਰ ਨੇ ਜਾਣਾ ਸੀ ਹੋਲਾ ਵੇਖਣ ਸਾਡੇ ਪੱਤੀ ਵੱਲੋਂ ਸਾਡੇ ਪਿਤਾ ਜੀ ਸੋਧੀ ਹੁੰਦੇ ਸਨ ਇਹਨਾਂ ਵਿੱਚੋਂ ਸਾਡੇ 4 ਘਰ ਇਹ ਨਾਮ ਸਨ ਲਹਿੰਦੀ ਪੱਤੀ ਵਿੱਚ 5-7 ਘਰ ਸਨ ਸੰਗਤ ਤਿਆਰ ਹੋਈ ਇਕੱਠੀ ਹੋ ਕੇ ਜਿਸ ਵੇਲੇ ਹੋਲਾ ਵੇਖਣ ਵਾਸਤੇ ਤੇ ਇਹ ਬਾਹਰੋਂ ਖੂਹ ਤੋਂ ਤੁਰਿਆ ਆਉਂਦਾ ਸੀ ਨੰਬਰ ਇਨੇ ਪੁੱਛਿਆ ਕਿੱਥੇ ਚੱਲੇ ਹੋ ਭਾਈ ਉਹਨਾਂ ਨੇ ਆਖਿਆ ਹੋਲਾ ਵੇਖਣ ਚੱਲੇ ਆ ਬਾਦਰਸਿਆਂ ਚੱਲ ਲੈ ਚਲੀਏ ਆਖਣ ਲਗਾ ਉੱਥੇ ਗਏ ਤੇ ਕੀ ਪਤਾ ਤੁਸਾਂ ਆਪਣਾ ਅਮਰਤ ਛਕਾ ਦਿੱਤਾ ਤੇ ਤੁਹਾਡੇ ਵਰਗੇ ਹੋਣਾ ਪੈ ਜਾਏਗਾ ਨਹੀਂ ਜਾਂਦੇ ਦਰਦੇ ਸਣ ਲੋਕੀ ਨਾਮ ਧਾਰੀਆਂ ਦੇ دیਵਾਨ ਤੋਂ ਦਰਦੇ ਸਣ ਭਈ ਐਵੇਂ ਚਾਹਾਂਗੇ ਤੇ ਐਵੇਂ ਜੀਵਨ ਬਦਲ ਜਾਏ ਜੀਵਨ ਬਦਲਣਾ ਮਨੋ ਚਾਹੁੰਦਾ ਨਹੀਂ ਕਿਉਂਕਿ ਇੱਥੇ ਆਣ ਕੇ ਜੀਵਨ ਬਦਲਿਆ ਜਾਂਦਾ ਮੈਂ ਅਰਜ ਕਈ ਵਾਰ ਅਰਜ ਕੀਤੀ ਐ ਕਿ ਸਕੂਲਾਂ ਤੇ ਕਾਲਜਾਂ ਦੀ ਵਿੱਧਿਆ ਬਹੁਤ ਚੰਗੀ ਐ ਪਰ ਉਹ ਮਨੁੱਖ ਦਾ ਜੀਵਨ ਨਹੀਂ ਬਦਲਦੀ ਉਹ ਜੀਵਨ ਚਲਾਉਣ ਵਾਸਤੇ ਭਈ ਪੜ ਕੇ ਕੀ ਬਣਨਾ ਥਾਣੇਦਾਰ ਬਣਨਾ ਕਿ ਕੋਈ ਵਪਾਰ ਕਰਨਾ ਕਿ ਦੁਕਾਨ ਕਰਨੀ ਹੈ ਕੀ ਕਰਾਂਗੇ ਜੀਵਨ ਨੂੰ ਚਲਾਉਣ ਵਾਸਤੇ ਐ ਪਰ ਸਤਗੁਰਾਂ ਦੇ ਜੜੀ ਗਿਆਨ ਐ ਜੋ ਸਤਗੁਰਾਂ ਕੋਲੋਂ ਗਿਆਨ ਮਿਲਦਾ ਜੋ ਸਤ ਸੰਗਤ ਵਿੱਚੋਂ ਗਿਆਨ ਮਿਲਦਾ ਉਹ ਮਨੁੱਖ ਦਾ ਜੀਵਨ ਪਲਟ ਕੇ ਰੱਖ ਦਿੰਦਾ ਇਸੇ ਵਾਸਤੇ ਨਹੀਂ ਸੁਣਨ ਵਾਸਤੇ ਬਹੁਤੇ ਆਉਂਦੇ ਉਥੇ ਗਏ ਤੇ ਉਹ ਉਥੇ ਨਾਮਤਾਰੀ ਹੁੰਦਾ ਦਿਵਾਲ ਜੇ ਗਏ ਤੇ ਉਹਨਾਂ ਨੇ ਆਖਣਾ ਸ਼ਰਾਬ ਛੱਡ ਦਿਓ ਮਾਸ਼ ਛੱਡ ਦਿਓ ਇਹ ਬਣਾਓ ਖਿਆਸੀ ਨਹੀਂ ਛੱਡਦੇ ਅਸੀਂ ਜਾਂਦੇ ਹੀ ਨਹੀਂ ਜਾਣ ਤੋਂ ਮੁਨਕਰ ਹੋ ਜਾਂਦੇ ਨੇ ਪਰ ਜਾਣਾ ਨਹੀਂ ਕਿਤੇ ਜੀਵਨ ਨਾ ਬਦਲ ਜਾ